ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਨੱਦੇ ਪਾਪੇ ਪਾ ਸਾਰਾ ਪਾਪ ਬੁਰਾ ਕਹਿੰਦੇ ਨੇ ਸਭ ਲੋਕ ਪਾਪ ਬੁਰਾ ਕਿੰਦਾ ਵੀ ਕੋਈ ਕਹਿੰਦਾ ਪਾਪੀ ਅੱਛਾ ਪਰ ਪਾਪੀ ਨੂੰ ਪਿਆਰਾ ਉਹ ਵੀ ਕਹਿੰਦਾ ਅੰਦਰੋਂ ਪਿਆਰ ਕਰਦਾ ਪਾਪ ਗੁਰਾ ਪਾਪੀ ਕੋ ਪਿਆਰਾ ਕਰਕੇ ਤਾਂ ਪਾਪ ਨਾਲ ਨੱਦੇ ਬੱਦੇ ਨੇ ਲੋਕ अच्छा पा जी। ਪਾਪੀਆਂ ਦੇ ਹਰ ਤੇ ਫਿਰਦੇ ਨੇ ਇੰਤਰੋ ਪਿਆਰ ਨੇ ਮੂਜੋ ਬੁਰਾ ਫੈਲਦੇ ਨੇ। ਹਾਂ। ਪਾਪੇ ਤਾਂ ਸਾਰਾ ਸਾਰਾ ਪਸਾਰਾ ਪਾਪ ਦਾ ਹੀ ਅਸਲ ਜੇ ਪਾਪ ਬੁਰਾ ਹੋਵੇ ਤਾਂ ਬੁਰਾ ਫਿਰ। ਇਹ ਜੋ ਕੋਈ ਛੱਲੇ ਨੂੰ ਛੱਲਣਾ ਪਸਾਰੇ ਨੂੰ ਉਹ ਛੱਲਣਾ ਚਾਹੁੰਦਾ। ਪਰ ਉਹਨਾਂ ਦਾ ਪਾਪ ਲੱਗੇ ਪਥਰਿਆ ਪਾਸਾਰਾ ਪਰ ਹਰ ਪਾਪ ਪਛਾਣੇ ਆਪ ਜੇ ਪਾਪ ਨੂੰ ਛੱਡ ਦੇਵੇ ਤਾਂ ਆਪ ਨੂੰ ਪਛਾਣ ਲਵੇ ਆਪ ਕੀ ਹੈ ਆਪਾ ਉਹ ਕੁਬਲਾ ਵਿਰੋਧ ਕਰਨਾ ਮੇਰੀ ਮਰਜ਼ੀ ਪਾਪ ਹੈ ਮੇਰੀ ਮਰਜ਼ੀ ਨੂੰ ਛੱਡ ਦੇਵੇ ਜੇ ਪਛਾਣ ਲਵੇ ਗੁਰ ਕੀ ਮਰਜ਼ੀ ਹੋ ਰਹਿ ਜਾਂਦੀ ਹੈ ਮੇਰੀ ਮਰਜ਼ੀ ਪਾਪ ਹੈ ਹਰ ਹਰ ਪਾਪ ਪਛਾਣੇ ਆਪ ਆਪ ਕੀ ਹੈ ਬੇਜਾ ਵਰਜੀ ਤਿਆਗਦੀ ਉਹ ਮੈਨੂੰ ਆਪ ਰਹਿ ਗਿਆ ਬਾਕੀ ਅੱਛਾ ਜੀ ਜੇ ਮੈਂ ਵਰਜੀ ਨਹੀਂ ਛੱਡੀ ਫਿਰ ਮੈਂ ਆਪ ਨਹੀਂ ਹੈਗਾ ਫਿਰ ਮੈਂ పాਪ ਹੂੰ ਜਿੱਦੀ ਵਰਜੀ ਆ ਉਹ ਪਾਪ ਹੈ ਜਿਹੜਾ ਵਰਜੀ ਤਿਆਗੀ ਫਿਰਦਾ ਉਹ ਆਪ ਹੈ ਅੱਛਾ ਜੀ ਆਪਰ ਪਾਪ ਵਾਲਾ ਆਪ ਮਰਜੀ ਛੱਡੀ ਵਾਲਾ ਆਪ ਹੈ। ਨਾ ਸੋਗ ਨਾ ਤਿਸ ਸੋਗ ਅਨਾਤਿਸ ਸੋਗ ਵਿਯੋਗ ਸੰਤਾਪ। ਸੁਯੋਗ ਵਿਯੋਗ ਸੰਤਾਪ ਉਹ ਮਰਜੀ ਚੱਲਦੀ। ਸੋਗ ਵੀ ਚਲਾ ਗਿਆ। ਉਹ ਆਪ ਹੈ। ਮਰਜੀ 버ਜੀ त्यागी ਆਪੇ ਆਪਨਾਂ ਜੁੜ ਗੋਇਆ ਕਰੇ ਰੌਲਾ ਹੀ ਮਾਜੀਦਾ ਜੀ ਜੀ ਹਾਂਜੀ ਨਰਕ ਭੜਨ ਤੋਂ ਕਿਉਂ ਰਹੇ ਕਿਉਂ ਬੰਚੈ ਜਮਕਾਲ ਕਿਉਂ ਆਵਣ ਜਾਣਾ ਬਿਸਰ ਝੂਠਾ ਬੁਰਾ ਖੈ ਖਾਲ ਦਰਗ ਬੜਨ ਤੋਂ ਕਿਉਂ ਰਹੇ ਇਹ ਦਰਗ ਤੋਂ ਕਦੇ ਬਚੇ ਸੋ ਬੱਜ ਚਜੰਕਾਲ ਜਮ ਕਾਲ ਦੀ ਜੋੜ ਤੇ ਕਿਵੇਂ ਬਚੇ ਦੋ ਸਵਾਲ ਲੈ ਅੱਛੀ ਨਰਕ ਭੈਣ ਤੋਂ ਬਾਹ ਸਕਦਾ ਹੈ ਜਮ ਦੀ ਜੋੜ ਤੋਂ ਬਾਹ ਸਕਦਾ ਹੈ ਸੋ ਬੱਜ ਚਜੰਕਾਲ ਤੋ ਆਪੜ ਜਾਣਾ ਬੀਤਣਾ ਝੂਠਾ ਬੁਰਾ ਆਉਣ ਜਾਣ ਸਕਦਾ ਹੂੰ ਹੂੰ ਅਹ ਤੂੰ ਸਾ ਬੁਰਾ ਖੈਡ ਆਨ ਆਨ ਅਹ ਨਾਲ ਦੀ ਖੁਰਾਕ ਬਣਨ ਤੋਂ ਕਿਵੇਂ ਬਚ ਸਕਦਾ ਹੈ ਅੱਛਾ ਜੀ ਉਸ ਆਪਣੀ ਬਾਕੀ ਖਾਣ ਦੇਵੇ ਉਹਦਾ ਹੋ ਜਾਵੇ ਉਹ ਦੇ ਵਿੱਚ ਜਾਣ ਨਾਲੇ ਬਚ ਸਕਦਾ ਕੁਛ ਉਹਦੇ ਖਤਰਾ ਹੁਣ ਦੇ ਪਲਵੇ ਗਿਆ ਜਾਵੇ ਆਲੇ ਮੁਖਿਆਰ ਕੇ ਮਨ ਲੈ ਕੋਈ ਇਹਦੇ ਡੇਲੇ ਵੀ ਜਾ ਸਕਦਾ। ਹਾਂ ਹਾਂ। ਨਾਲ ਕਿਹੜੀ ਪਾ ਸਕਦਾ ਬਹੁਤ ਜਿ ਬੈਠਾ ਹੈ ਨਾਲ ਕਿ ਕੌਣ ਪਾ ਦੂ ਇਹਨੂੰ। ਹਾਂ ਹਾਂ। ਆਲੇ ਜੇ ਨਹੀਂ ਜਾਂਦਾ ਬਸ ਆਪੇ ਹੀ ਆ। ਹਾਂ ਹਾਂ। ਸਾਰਾ ਰੋੜਾ ਨਾ ਭਾਣ ਬੰਦਨ ਦਾ। ਰੋਈ। ਦਾ ਮਤਲਬ ਹੈ ਵੀ ਕਾਲ ਦੀ ਖੁਰਾਕ ਨਾ ਬਣੇ। ਨਾ ਕਾਰੇ ਨੂੰ ਸ਼ੈ ਕਰ ਦਿੰਦਾ ਹੈ ਖਤਮ ਕਰ ਦਿੰਦਾ ਹੈ ਅੱਛਾ ਜੀ ਜਿਹੜੀ ਉਹ ਵੀ ਕਰਦਾ ਹੈ ਹੋਰ ਕੀ ਕਰਦਾ ਜਿਹੜੀ ਉਹਦੀ ਬਰਜੀ ਆ ਉਸ ਨੂੰ ਆਦਾ ਕਾਲ ਇਹਦੀ ਬਾਕੀ ਨੂੰ ਫਿਰ ਕਾਲ ਮਾਰਦਾ ਆਪੇ ਮਾਰ ਲਵੇ ਆਪੇ ਮਾਰ ਲਵੇ ਬਰਜੀ ਨੂੰ ਜੇ ਆਪ ਮਾਰ ਲਵੇ ਤਾਂ ਦੀ ਲੋੜ ਵੀ ਨਹੀਂ ਜੀ ਉੱਪਰ ਮਾਰਦਾ ਮਾਰ ਸਕਦਾ ਕੀ ਗੰਝਾਲੀ ਵੇੜਿਆ ਪੀਂ ਜੰਝਾਲਾਂ ਮਾਹੇ ਬਿਨ ਮਾਹੇ ਕੀ ਛੁੱਟੀਏ ਪਾਪੇ ਪਚਾਂ ਪਚਾਹੀ ਗੁਜਾ ਜਾਲੀ ਵੇੜਿਆ ਗੁਜਾ ਜਾਲ ਹੋਇਆ ਹੂੰ ਹੂੰ ਜੇ ਸਾਰੇ ਨਾਲੇ ਟੋਕ ਕੋਲ ਜੇਤਲੇ ਦੇਤੇ ਹੁਣ ਵੀ ਜੰਝਾਲਾਂ ਦੇ ਕੀ ਹੈ ਅਹ ਜਗਾ ਜੇ ਰਹਿਣਾ ਵਾਦੂਆ ਕੀ ਕਰਦਾ ਹੈ ਪਾਪ ਤੇ ਆਪ ਦੇ ਬਿਨਾ ਚੱਲ ਕੇ ਜੀਰਾ ਨਹੀਂ ਟੱਡੀਆਂ ਜਾ ਕੋਲ ਹੋਰ ਤਾਂ ਕੱਕੀਉ ਦੇ ਸੇ ਪਾਈ ਦੇ ਲੋਭ ਜਿਹੜਾ ਲੋਭ ਦੀ ਜਿਹੜੀ ਹੈ ਘਾਤੀ ਕੱਟ ਦਿੰਦੀ ਹੈ ਜੀਰਾ ਅੱਗੇ ਜੀ ਬਿਨ ਹੈ ਜੋ ਵੀ ਤੇ ਬਿਲੋ ਦਸਾ ਪਰਿਵਿਸ਼ ਲਗਾ ਰਿਹਾ ਹੋ ਆਪੇ ਪਚੇ ਪਚਾਹੀ ਆਪੇ ਪਕੇ ਸਿਚਾਏ ਆਪਾਂ ਦੇ ਵਿੱਚ ਪਜਾ ਪਜਦਾ ਰਹਿੰਦਾ ਨਹੀਂ ਤਾਂ ਲੋਭ ਤੇ ਬਿਲੋ ਕਰਦਾ ਰਹਿੰਦਾ ਸੋਝਾ ਇਹਦਾ ਠੀਕ